ਸਾਧਕੇ ਸੰਗੀ ਨਹੀਂ ਕੁਛ ਕਾਲ ਸਾਧਕੇ ਸੰਗੀ ਨਹੀਂ ਕੁਛ ਕਾਲ ਜਦ ਸਾਧਲੇ ਆਣਾ ਮਾਣੂ ਫਿਰ ਕਰਮ ਨੂੰ ਕੁਛ ਨਹੀਂ ਬਚਿਆ ਟਰੜਗਮਾਂ ਨਹੀਂ ਬਚਿਆ ਨਹੀਂ ਕਿਸਕਾ ਸਾਧਕੇ ਦੀ ਲੋੜ ਨਹੀਂ ਜੀ ਕਿਤੇ ਨਹੀਂ ਪੜਨਾ ਹਲਣਾ ਫਿਰ ਸ਼ਬਦ ਵਿਚਾਰ ਵਾਲੀ ਕਾਲ ਮੁੱਕ ਗਈ ਨਹੀਂ ਕਿਸਕਾ ਕਾਲਕਮਾਈ ਖਤਮ 10 ਰੁਪੇੜ ਤੋਂ ਹੋਤ ਨੇ ਉਹ ਤੇ ਇਤਹਾ ਹੈਗਾ 10 ਰੁਪੇੜ ਤੋਂ ਹੋਤ ਨੇ ਹਾਲ ਉਹਦੇ ਗੱਲ ਆ 10 ਵਾਰਸੀ ਗੱਲ ਨਾ ਕਰਨੀ ਸੀ 10 ਨੇ ਦਰਸ਼ਨ ਹੋ ਗਿਆ ਸਿਮ ਦੇ ਹਾਲ ਵੀ ਹੋ ਗਿਆ ਉਹਨੂੰ ਤਾਂ ਨਗਰ ਵੀ ਮਿਲ ਗਈ ਜਗਾ ਜਾ ਕੇ ਆਪਣਾ ਸ਼ੀਟ pe mil gayi oh ta on duty chale gaya oh school nu jaauga oh pher ek azaad likhan lag gaya mil ke utthe ja ke ore se kubar se khilya naam gurme se naam japya bilkul gurme se dhyan khobar rasul da rehta hunda mera gurme khar gaya na ek var rasul da vida ਕਿ ਪੂਰਾ ਫੁੱਲ ਆਇਆ ਹੈ। ਕਮਾ ਬਹੁਤ ਆ ਰਹੀ। ਜਿੱਦ ਇੱਕ ਵਾਰ ਗੱਲ ਸਮਝ ਲਈ ਜਿਹੜੀ ਗੱਲ ਇੱਕ ਵਾਰ ਸਮਝ ਕੇ ਆ ਕੇ ਬੈਠ ਕੇ ਉਹਦਾ ਹਮੇਸ਼ਾ ਵਾਸਤੇ ਆ ਗਈ। ਜਿਹੜੀ ਅਜੇ ਨਹੀਂ ਆਈ ਘਟ ਆਈ ਹੈ ਉਹ ਫਿਰ ਨਹੀਂ। ਉਥੇ ਬੈਠਾ ਚਾਹ ਦਾ ਬੁਖਾਰ ਹੈ ਗਿਆ। ਚਾਹ ਘਟਦੀ ਆ ਤਾਂ ਜ਼ਿਆਦਾ ਹੁੰਦੀ। ਤੇ ਜਿਆਦਾ ਪੂਰਾ। ਮਨ। ਉਥੇ। ਆਈ ਗੱਲ ਜਾ ਸਮਝਣ ਵਾਲਾ ਕੋਈ ਸਮਝਾਉਣ ਵਾਲੇ ਦੀ ਸਮਝ ਨਹੀਂ ਸੀ ਆਈ ਗੱਲ ਕੋਈ ਕਾਰਨ ਬਣਿਆ ਹੋਵੇ ਸਾਧਕੇ ਸੰਗੀ ਕਲੁਖਿਤ ਹਰੇ ਹਾਂ ਅੰਦਰੀ ਮਨ ਕਾਲਾ ਜੀ ਕਾਲਾ ਹੋਇਆ ਸਾਬ ਇਹ ਜਿਹੜੀ ਕਲੁਖਤ ਹੈ ਕਲੁਖਤ ਕਲੰਕ ਇਹ ਕੋਈ ਗੱਲ ਤੇ ਦੇ ਕੈ ਕਿਸੇ ਕਲਮ ਰਜ਼ਾਇਤਨ ਕੋ ਕੋ ਨ ਕਲਮ ਕਾ ਗੇ ਰਾਮ ਨਾਮ ਲੈ ਲਈ ਐਸੇ ਕਲੂਖ ਤਾਂ ਕਾਲਸ ਹਰੇ ਹਰੇ ਜਿਹੜਾ ਸਾਧ ਦੀ ਸੰਤਤ ਹੈ ਸਾਧਾ ਸੱਜੀ ਹੈ ਉਹ ਕਲੂਖ ਹਰਾ ਆਪਣੀ ਦੀ ਨਾਲਦਿਆਂ ਦੀ ਵੀ ਹਰਾ ਆਪਣੀ ਦਾ ਹਲ ਹੈ ਦੀ ਕਲੂਖ ਹਰੀ ਹੋਈ ਹੈ ਫੇਰ ਕਹਦਾ ਤੇ ਫੇਰ ਜੇ ਤੂੰ ਖਲੂਕ ਤੇ ਆਈਏ ਉਹਦਾ दूर ਗਾਹੜਾ ਜੀ ਉਹਨੇ ਆਪਣੀ ਦਾ ਖਲੂਕ ਤਾਂ ਹੱਲ ਲਈ ਆਪਣਾ ਪਰਪਤਾ ਦੂਰ ਕਰ ਲਿਆ ਹੁਣ ਦੂਜਿਆ जाते ਦੂਰ ਕਰਦਾ ਹੈ ਕਿਉਂਕਿ ਦੂਜਾ ਦੂਰ ਕਰਨਾ ਪਊਗਾ ਕਿੱਤਾ ਜਾ ਮੈਂ ਨਹੀਂ ਤਾਂ ਫਿਰ ਕੋਈ ਆਈਡੀਆ ਨਹੀਂ ਸੀ ਗੁਰੂਆਂ ਦਾ ਸੰਬੰਧ ਕਰਨਾ ਦਿੱਤਾ ਜੀ ਉਹ ਦੀ ਹੈ ਗਰੰਤਾ ਨਹੀਂ ਵੀ ਲੋੜ ਹੀ ਨਹੀਂ ਤੇ ਤਾਂ ਉਹਦੀ ਬਰਕਤ ਦਾਆਂ ਸੰਕਰੋੜ ਫਿਰ ਤਾਂ ਦੀ ਸਭ ਦਾ ਅਸਰ ਕਹਿੰਦਾ ਸਾਡੇ ਸਾਡੇ ਨਾਲ ਕੀ ਭਾਗ ਜਿਹਦਾ ਅਵਸਰ ਕਾਰੋਂ ਪਰਸੇ ਹੋ ਸਕਦਾ ਕਾਲਾ ਆਤਾ ਫਿਰ ਸਾਧ ਦੀ ਜਦ ਅਸਰ ਪੈ ਸਕਦਾ ਬਿਲਕੁਲ ਪਹਿਲਾ ਮੇ ਲਿਖਿਆ ਜੈਸੀ ਸੰਗਤ ਜੋ ਜੈਸੀ ਸੰਗਤ ਕਰੇਗਾ ਅਸਾਹੀ ਗੁਰਪਾਇ ਧਿਆ ਤ ਹੋ ਰ ਹੈ ਕਹਨ ਦਾ ਦਾ ਸ਼ਲੋਕ ਆਪਣੇ ਨਹੀਂ ਹੋ ਆ ਤੁਸੀਂ ਦਰਸ ਆਉਦਾ ਹੋਦਾ ਹੈਗਾ ਜਿਹੜਾ ਹੋਦਾ ਹੋ ਕਦਲੀ ਸੀਪ ਭਯੰਗ ਭੁਖ ਕਰਲੀ ਤੇਲੇ ਰ ਬਹਨ ਦੀ ਕੇ ਲੇ। ਕਦਲੀ ਸੀਪ, ਸੇਪ। ਉਹ ਜਾਂ ਨਬੂ ਕੋ ਸੋਪ ਲਵੂ। ਸਵਾਤੀ ਏਕ ਗੁਣ ਤੀਰ। ਕਿਉਂ ਸਵਾਤੀ ਦਾ ਖਤਰ ਹੁੰਦਾ ਪਸੂ ਦੇ ਵੀ ਦੇ। ਕੋਈ ਕਹਦਾ ਹੁੰਦੀ ਆ। ਪਸੂ ਆਪਣੇ ਹੋ ਰਾਇਆ। ਪ੍ਰੇਮ ਮੋਹੜਾ। ਉਸ ਵੇਲੇ ਬਰਸਦੀਏ ਹੋ। ਇਹਨਾਂ ਨੇ ਆ ਸੁਬਾਨ ਅੱਲਾ ਚਲੋ। ਫਦਲੀ ਸੀਪੂ ਬਯੰਤੂ ਕੋਲ ਜ਼ਾਤੀਏ ਕੋਲ ਤੀਰ ਜੈਸੀ ਸੰਗਤੀ ਬੈਠੀ ਐ ਤੈਸੋ ਹੀ ਫੜਦੀ ਹੁਣ ਕੰਡੇ ਜੋ ਬੂਤ ਪੈ ਜਾ ਕਪੂਰ ਬਣ ਜਾਂਦਾ ਕੰਡੇ ਚ ਸੱਪ ਜੇ ਪੈ ਜਾ ਸੱਪ ਜਦੋਂ ਖੰਧ ਹੋ ਜਾਂਦਾ ਉਹ ਮੋਤੀ ਬਣ ਜਾਂਦਾ ਸਿਪਰੋਂ ਕੋ ਖਲੋਂ ਹੁੰਦਾ ਜਦੋਂ ਜੇ ਬੂਤ ਪੈ ਗਈ ਉਹ ਕਹਿੰਦੇ ਉਹ ਪੂ ਬਿਜਲਣੀਆਂ ਮੋਤੀ ਬੰਦ ਕੇ ਨਿਕਲ ਕਿੱਥੇ ਕਿਹਾ ਹੋਇਆ ਉਹਨਾਂ ਦਾ ਬੰਦੇ ਹੋਇਆ ਪਰ ਹੁਣ ਸਾਰੇ ਰੇਤਾ ਪਿੱਛੇ ਕਹਿੰਦੇ ਉਹ ਰੇਤਾ ਹੀ ਬਣਦਾ ਵੀਰ ਉਹਦੀ ਗੱਲ ਹੋਈ ਹੈ ਗੱਲ ਉਹ ਵੀ ਠੀਕ ਹੈ ਗੱਲ ਇਹ ਵੀ ਠੀਕ ਹੈ ਇਹਨਾਂ ਨੇ ਸਿੱਪ ਦੇ ਅਸਤਫਾ ਨੂੰ ਵਾਲ ਦੇ ਬਣਾ ਦੇ ਵਾਲ ਦੇ ਹੀ ਬਣਦੇ ਪੇਜਾਂ ਨੂੰ ਪ੍ਰਧਾਰ ਸੇ ਸੋ ਸੁੱਖ ਮੰਨੂ ਗਿਆ ਉਹ ਤੇ ਹਾਂ ਸਾਰੇ ਬਾਹਲੇ ਬਣਾ ਲੇ ਉਹ ਭਲੇਖਾ ਟਾਂ ਖੜਾ ਹੋ ਗਿਆ ਭਲੇਖਾ ਸੱਪ ਦੇ ਮੂੰਹ ਜਿਹੜਾ ਮਾਨ ਹੈ ਮਾਨ ਕੋ ਖਾ ਉਹ ਸੱਪ ਹੂੰ ਉਹਦੇ ਮੂੰਹ ਚ ਪਾ ਜਾਏ ਉਹਦਾ ਦਾ ਜਿਹੜੇ ਦੂਏ ਨੇ ਆਹ ਜਿਹੜੇ ਜ਼ਰਬੂਤ ਵਾਲੇ ਇਹ ਸਾਰੇ ਥੱਪੇ ਨੇ ਇਹ ਸਾਰੇ ਸਾਰੇ ਨਸ਼ਾ ਖਾਣੇ ਵਾਲੇ ਜੀਪ ਤੇ ਥੱਪ ਲੜਾਉਣੇ ਵਾਲੇ ਨੇ ਜੋ ਵੀ ਜਿੱਦੇ ਵੀ ਇਹ ਕਰਦੇ ਨੇ ਬਲੀਆਂ ਹੁਲੀਆਂ ਘੇੜਦੇ ਉਰੇ ਪਰੇ ਤੋਂ ਬੁਸਾਰੇ ਧਰਮ ਭੋਗੇ ਸਾਰਾ ਤੁਨ ਪਰ ਲਗਾਉ ਉਹ ਫਿਰ ਥੱਪੇ ਹੋਣਾ ਉਹ ਉਠਾ ਉਹਦੇ ਉਠਾ ਕੰਮ ਕਰਦੇ ਨੇ ਉਹਦੇ ਨਾਲ ਵੀ ਕਰਦੇ ਨੇ ਉਹਦਾ ਕੰਮ ਉਹ ਸਭ ਕੁਝ ਸਭ ਦੁੱਧ ਪਲਾਈ ਹੈ ਮੁੱਖ ਵੀ ਖੂਸਟਾ ਮੁੱਖ ਵੀ ਗੂਸਟਾ ਸਾਧਕੇ ਸੰਗੀਤ ਲੋਕਤ ਹਰੇ ਸਾਧਕੇ ਸੰਗੀਤ ਨਰਕ ਪਰ ਹਰੇ ਸਾਧਕੇ ਸੰਗੀਤ ਕਲੂਖਤਾ ਰਹੇ ਸਾਧ ਜਿਹੜਾ ਆਪਣਾ ਮਨ ਨੂੰ ਸਾਧ ਲੈਂਦਾ ਆਪਣੇ ਦੁਦੀ ਜਿਹੜੇ ਕਾਲਸ ਧੋ ਲੈਦਾ ਉਹ ਦੂਜਿਆਂ ਦੀ ਸੂਰਤ ਦੇ ਵਿੱਚ ਮਦਦ ਕਰ ਸਕਦਾ ਧੋਤਾ ਨਹੀਂ ਸਕਦਾ ਔਰ ਦੇ ਜੀ ਨਹੀਂ ਦੱਸ ਸਕਦਾ ਹਾਂ ਜੀ ਸਾਧਕੇ ਸੰਗੀ ਨਰਕ ਪਰ ਹਰੇ ਸਾਧਕੇ ਸੰਗੀ ਮਨ ਨੂੰ ਸਾਧਕੇ ਜੇ ਨੜਕਾ ਉਹ ਉਹ ਤਾਂ ਦੂਰ ਰਹਿੰਦਾ ਹੈ ਨਰਕ ਪਰੇ ਕਰ ਦਮਦਤ ਨਰਕ ਕੀ ਹੈ ਨਰਕ ਆ ਗਿਆ ਹਾਂ ਤੈਨ ਨਰਕ ਪਰਮ ਨਰਕ ਪਰਮ ਵੱਧਾ ਹੈ ਨਰਕ ਵੱਲ ਨੂੰ ਜਾਂਦਾ ਹੈ ਗਿਆਨ ਵੱਲ ਦਾ ਸਵਰਗ ਵੱਲ ਨੂੰ ਜਾਂਦਾ ਹੈ ਇੱਕ ਪਾਸੇ ਦੇ ਰਾ ਇੱਕ ਪਾਸੇ ਚੱਲਣਾ ਗਿਆਨ ਦਾ ਚੱਲਣਾ ਵੱਧਾ ਹੈ ਸਵਰਗ ਵੱਲ ਨੂੰ ਜਾਂਦਾ ਆਪਣੀ ਘਰ ਵੱਲ ਨੂੰ ਜਾਂਦਾ ਜੇ ਅ ਗਿਆਨ ਦਾ ਵੱਤੀ ਹੈ ਉਹ ਫਿਰ ਸੇ ਨਰਕ ਵੱਲ ਨੂੰ ਫਦਰੀਆਂ ਜੂੜੀਓ ਬਾਲੂ ਜਿੰਦਾ ਆਦਮੀ ਦਾ ਜਿਹੜਾ ਗਿਆਨ ਹੈ ਸਾਰੀਆਂ ਜੂਨਾਂ ਨਾਲੋਂ ਵਧੀਆ ਜੇਲਾ ਜਦ ਥੱਲੇ ਨੂੰ ਜਾਉਦਾ ਥੱਲੇ ਦੀ ਜੂੜੂ ਤਾਣੀ ਨੂੰ ਖੋਤਾ ਗਿਆ ਹੈ ਤੇ ਖੋਤੇ ਆਲਾ ਕੰਮ ਕਰੂ ਖੋਤਾ ਜਾਇਲਾ ਕੰਮ ਕਰੂ ਜੇ ਦੁੱਧ ਪੀ ਕੇ ਫੇਰ ਝੂਠੂ ਫਿਰ ਸੱਚ ਦੀ ਜੂੜੂ ਪੈ ਜੀ ਹੂੰ ਕੇ ਵੀ ਗੁਰਮਤਿ ਤਰੂ ਕੌਮਿਕੇ ਵੀ ਤੋੜ ਬੜੋੜ ਕੇ ਬੀਖੂ ਸੁਟਾ ਨਿਮੋ ਕਰ ਰਹੇ रहे ਹੁਣ ਤੇ ਲੱਗੇ ਹੋਏ ਨੇ 10 ਦੇ ਖਿਲਾਫ ਇਹ 8 ਦੇ ਵੀ ਖਿਲਾਫ ਜੇ ਕੇ ਸਮਝ ਗਏ ਉਹ ਪਹਿਲਾਂ ਵੀ ਲੱਗੇ ਹੋਏ ਸੀ ਉਦੋਂ ਰਾਮ ਰੇ ਜੇ ਧੀਰ ਬੜੀ ਜਿਹੜੇ ਸੀ ਸਾਰੇ ਉਹਨਾਂ फिर ਬਾਦ ਦੇ ਵਿੱਚ ਦੁਬਾਰਾ ਗੁਰੂ ਦਾ ਕਾਲ ਚ ਵੀ ਹੋਏ ਨੇ ਗੁਰੂ ਵੀ ਹੈਗੇ ਨੇ ਰਹਿਣ ਦੇ ਵੀ ਇਹ ਇਹ ਬਰਾਬਰ ਚੱਲਈ ਜਾਏਗੀ ਦੋਏ ਜਿਹੜੇ ਨੇ ਦੋਏ ਚੀਜ਼ਾਂ ਚਲਦੀਏ ਰਹਿੰਦੀਆਂ ਪੁੱਤ ਆਰ ਪਾਪ ਤੇ ਬਿਨਾ ਸ੍ਰਿਸ਼ਟੀ ਰਹੇ ਨਹੀਂ ਸਕਦੀ ਪਾਪ ਪੁੱਤ ਪਾਪ ਪੁੱਤ ਦੋਨੋਂ ਭਾਈ ਅ ਪਹਿਲਾਂ ਤਾਂ ਖਬੀਰ ਕੁਝ ਹੋਰ ਕਹਿੰਦਾ ਫਿਰ ਤਾਂ ਖਬੀਰ ਉਲਟਾ ਹੋਰ ਵੀ ਕਹਿੰਦਾ ਦਿੱਤਕ ਨੇੜੇ ਰੱਖੀਏ ਰਾਖੀਏ ਕਹਿੰਦੇ ਇੱਕ ਦੋ ਦਿੱਤਕ ਚਾਹੀਦੇ ਪਤਾ ਲੱਗਦਾ ਸਾਰੇ ਫਿਰ ਤਾਂ ਜੇ ਗਲਤ ਗੱਲ ਲੂ ਮੀਆਂ ਜੀ ਜੇ ਕਰਦਾ ਨਾ ਉਹਨਾਂ ਨੇ ਤਾਂ ਦੱਸੋ ਲਿਆ ਨਾ ਕਿ ਤੂੰ ਗੱਲ ਕਰ ਗਿਆ ਤੂੰ ਦਿੱਤਕ ਨੇੜੇ ਰੱਖੀਏ ਆਂਕਣ ਕੁਠੀ ਛਪਾਏ ਫਿਰ ਪਾਣੀ ਸਾਬਣ ਬਣਾ ਨਿਰਮਲ ਕਰੇ ਸਮਾਜ ਇਹ ਤਾਂ ਕੱਚੀ ਵਾਲੀ ਏ ਫੇਰ ਕਹਿ ਦਿੱਤੋ ਦਿੱਤੋ ਮੋਖ ਲੋਗ ਇਹਨੂੰ ਦੋ ਦੱਦਾ ਜਨ ਕੀ ਖਲੀ ਪਿਆਰੀ ਚੰਨ ਲੂਣ ਦਿਆ ਨਾਲ ਕੋਈ ਨਫਰਤ ਪਾਗੇ ਦੱਦਾ ਜੇ ਮਨ ਸੱਚੇ ਨਾਲ ਜੱਗ ਰੇਤੇ ਹੋਏ ਰੇਤੇ ਸੁਧੇ ਜੋ ਦੱਦਾ ਹੋਏ ਰੇਤੇ ਸੁਧਾਰੇ ਦੱਦਾ ਹੁੰਦੀ ਏ ਉਹਦੇ ਭਲੇ ਵਾਸਤੇ ਕਰੀਏ ਭਾਈ ਆ ਤੇਰੇ ਚ ਕੋਈ ਹਰ ਚੀਜ਼ ਕਰ ਜਿਹੜੇ ਰਾਤ ਤੂੰ ਤੁਰਿਆ ਜਾਂਦ ਜਿਹੜਾ ਬੁੱਢਾ ਰੁਕਾ ਤੂੰ ਰਹਿਣ ਦੇ ਇਹ ਰਾਤ ਹੀ ਕੰਡਾ ਔਰ ਜੇ ਫਿਰ ਇਹ ਸਾਰਾ ਜਣਾ ਚਲੇ ਗਏ ਸਾਮਾਰ ਖਾ ਗਏ ਉਹ ਚਾਹੇ ਆਪਣੀ ਜ਼ਿੱਦਿਆ ਸਭ ਦਾ ਹੋਵੇ ਮੈਨੂੰ ਕਹਿਤਾ ਪਰ ਉਹ ਸਵਾਦ ਆ ਮਾੜੀ ਜ਼ਿੱਦ ਸੀ ਫਿਰ ਤੇ ਸ਼ੋਤਨੰਦ ਤੈਹੀ ਤੇ ਉਹਦੇ ਭਲੇ ਵਾਸਤੇ कंस्ट्रक्टिव क्रिटिसिज्म हां कंस्ट्रक्टिव क्रिटिसिज्म अब आपा जी, जी कुछ बनावण वास्ते ओदा कोई भला करन वास्ते हां क्रिटिसइज ਕੀਤਾ ਆਪਾ ਲੋਕ ਤੇ ਸੰਪੂਰਨ ਵਕਤਿਆ ਮਨ ਦੇ ਨਾਲ ਇਹ ਅੰਤੋਂ ਇੱਕ ਸ਼ਬਦ ਪ੍ਰਾਪਤ ਹੋਦਾ ਆਪਾ ਲੋਕ ਕਹਿੰਦੇ ਆਹ ਪ੍ਰਾਪਤ ਸ਼ਬਦ ਹੈ ਜਾਂ ਕਿਹੜਾ ਕਲੂਖਤ ਗਲੂਖਤ ਕਲੂਖਤ ਲੋਕ ਕਹਿੰਦਾ ਗਲੂਖਤ ਪ੍ਰਾਪਤ ਵੀ ਕਹਿੰਦੇ ਨੇ ਨਹੀਂ ਨਹੀਂ ਨਹੀਂ ਕਲੂਖਤ ਲੱਲੇ ਦਾ ਕਲੂਖਤ ਗਲੂਖਤ ਹੈ ਗਲੂਖਤ ਹੈ ਉਹ ਆਲਾ ਪੰਨ ਸੁਰਖਤਾਂ ਨੂੰ ਵੀ ਬਤਾਉਂਦਾ ਕਿ ਉਹ ਬੜੜੇ ਹੋ ਰਹਾ ਹੈ ਇਹ ਬੜੜੇ ਹੋ ਰਹਾ ਹੈ ਰਖਤ ਹੋ ਰਹਾ ਜੀ ਨਰਕ ਪਰ ਹਰੇ ਹਾਂ ਨਰਕ ਨੂੰ ਪਰੇ ਭਜਾਉਂਦਾ ਸਮਾ ਗਿਆ ਤਾਨੂੰ ਨਰ ਕਾਲੇ ਪਖਰੂ ਦੂਰ ਭਜਾਉਂਦਾ ਦੂਰ ਨਹੀਂ ਦੂਰ ਜਾਈ ਸਾਧਕੇ ਸੰਗੀ ਇਹਾ ਉਨਾਂ ਸਹੇਲਾ ਉਹ ਲੋਕ ਨਰਕ ਵਾਲੋਂ ਜਾਏ ਹੋਏ ਉੜਦੇ ਹੋਏ ਨਾ ਜਾ ਰਹੇ ਨੇ ਅਗਿਆਨਤਾ ਵਾਲੋਂ ਜਾ ਰਹੇ ਨੇ ਫਿਰ ਉਹ ਅਗਿਆਨਤਾ ਉਹਨੂੰ ਜਾਂਦੇ ਸੰਗੀ ਇੱਥੇ ਵੀ ਸਹੇਲਾ ਅਗੇ ਵੀ ਸਭ ਕਹੋ ਚੰਤਾ ਤੋਂ ਮੁਕਤ ਰਹਿਣਾ ਹੈ ਸਹੇਲਾ ਚੰਤਾ ਤੋਂ ਮੁਕਤario ਹੋ ਗੱਲਦਾ ਚਿੰਤਾ ਨਹੀਂ ਆ ਸੋਇ ਲਾਦੀ ਸੌਖਾ ਚਿੰਤਾ ਜੇ ਚਿੰਤਾ ਹੈ ਜੀ ਜ਼ਿਆਦਾ ਕਿਤੇ ਆ ਬੜੇ ਔਖੇ ਸਾਧ ਸੰਗੀ ਵਿਸਰਤ ਹਰ ਮੇਨ ਸਾਥ ਸੱਗੀ ਹਾਂ ਵਿਸਰਤ ਹੋਇਆ ਹੈ ਇਹੋ ਉਹਦੇ ਨਾਲ ਇਸ ਸਤ ਹਰ ਮੇਲਾ ਜਿਹੜਾ ਹਰ ਦਾ ਬਿਸਰਿਆ ਹੋਇਆ ਹਰ ਨੂੰ ਉਹ ਨੂੰ ਵੀ ਹਰ ਬਣਾ ਦਿੰਦਾ ਜਿਹੜਾ ਹਰ ਨੂੰ ਭੁੱਲਿਆ ਹੋਇਆ ਹਮ ਹਰਦਰਨ ਸੰਭਦੇ ਹਮ ਹਰ ਹੀਰਾ ਛਾੜ ਕੇ ਉਹ ਬਾਹਰ ਢੋਲਦੇ ਹੋਇਆ ਬਿਸਰਿਆ ਹੋਇਆ ਕੋਈ ਗੱਲ ਹੈ ਉਹ ਵਿਛੜਿਆ ਹੋਇਆ ਔਰ ਹੋਇਆ ਬਿਸਰਿਆ ਹੋਇਆ ਵੀ ਵਿਛੜਿਆ ਹੈ ਵਿਛੜਿਆ ਠੀਕ ਹੈ ਇਹ ਵਿਛੜ ਤਾਂ ਵੀ ਕੋਈ ਗੱਲ ਹੈ ਜਿਹੜਾ ਵਿਸਰਿਆ ਹੋਇਆ ਉਹ ਪਛੜਿਆ ਹੀ ਹੋਇਆ ਇਹ ਵਿਸ ਵਿਸਰਾਈਂ ਵਿਛੋੜਾਏ ਸ ਯਾਦ ਆਉਣਾ ਮੇਲਾ ਚੇਤੇ ਆਉਣਾ ਮੇਲਾ ਵਿਛੜਣਾ ਵਿਛੋੜਾ ਆਰ ਬਿਸਰ ਸਦਾ ਘੋੜੀ ਉੱਥੇ ਵਿਸਰਦਾ ਆਇਆ ਹੋਇਆ ਇੱਥੇ ਵਿਛੜਦਾ ਆਇਆ ਜੋ ਛੇ ਸੋਈ ਕੋਲ ਫਲ ਪਾਵੇ ਸਾਥ ਕੇ ਸੰਗੀ ਨਾਲ ਵਿਰਥਾ ਜਾਵੇ ਜੋ ਛੇ ਸੋਈ ਕੋਲ ਪਾਵੇ ਇੱਥੇ ਕਾਖੇ ਹਰ ਗੱਲ ਆ ਗਈ ਜਿਹੜਾ ਸਾਧਨੀ ਸੁਖਤ ਕਰਨ ਵਾਲਾ ਹੈ ਜੇ ਜਿਹੜੀ ਛਾਵੇਂ ਹੋ ਜਾ ਫਲ ਪ੍ਰਾਪਤ ਕਰ ਸਕਦਾ ਉਹ ਚਾਹੇ ਭੁਗਤੀ ਕਾਲ ਵਿੱਚ ਚਾਹੇ ਤੁਝੋਤ ਸਮੇਂ ਉਹ ਵੀ ਖੜੀ ਜੀ ਬਰੇਚਾ ਹੋਰ ਪ੍ਰਾਪਤ ਕਰ ਲਿਆ ਫਿਰ ਭੁਤੇ ਜੀ ਨਾਲ ਹੋਰ ਜਾ ਮੈਂ ਮੇਰੇ ਦੁਕਾਨੇ ਦੇ ਇੱਥੇ ਹੋਇਆ ਹਾਂ ਤਾਂ ਵੀ ਭਾਈ ਜੇ ਕੁਝ ਮੁggenਾ ਫਿਰ ਉੱਥੇ ਉੱਥੇ ਮੁੱਕੀ ਗਏ ਕਿ ਜੋ ਕੋ ਤਰ ਉਹ ਵੀ ਹਿਉ ਸਾਦਾ ਪਾਵੇ ਦਾ ਮਤਲਬ ਹੈ ਜੇ ਉਹ ਇਦਾਂ ਦੀ ਗੱਲ ਨਾ ਕਹਿੰਦੇ ਤਾਂ ਉਹਨੂੰ ਇਹ ਕਿਹਾ ਵੀ ਤੂੰ ਤਜਰਬਾ ਕਰਕੇ ਦੇਖ ਲੈ ਵੀ ਰਾਤ ਠੀਕ ਜਾ ਰਹੇ ਨਹੀਂ ਜਾ ਰਿਹਾ ਉਹਦਾ ਭਰੋਸਾ ਕਰਨ ਹੋਵੇ ਜਾਣ ਹੋਵੇਗਾ कि सामने संगरे में बेनिफिट भी है कि नहीं है ते प्राप्ती है तेरे बच्चे और केते साद का सुनना विच्छा जावे विच्छा दी जा सके जो चीज वही परवव साद के संगिना ਜੋ ਬੰਦੇ ਠਾਗਰਾ ਉਹਨੇ ਸੋਈ ਸੋਈ ਜਿਹਾ ਉਹ ਤਾਂ ਮੰਗਣਾ ਨਹੀਂ ਛੜਖੜਾ ਕੀ ਮੰਗਦਾ ਨਹੀਂ ਮਤਲਬ ਕਹਿ ਦਾਲੂ ਉਹ ਦਾ ਗੱਲ ਉਹ ਛੇ ਕਹਿੰਦਾ ਛੇ ਹੋਈ ਬਸ ਤਾ ਉਹਦੀ ਛਾਹ ਤੇ ਖੜੀ ਆ ਪਰ ਉਹ ਕਹਾਂ ਰੁੱਕ ਕੇ ਆ ਜਾ ਤੇ ਪਿੱਛੇ ਵੀ ਰੁਕਦਾ ਹੋ ਇਹਦਾ ਜੋ ਇੱਥੇ ਹੀ ਆ ਰੋੜੀ ਦਾ ਗਿਆ ਰੁ ਕਹਾਂ ਮੰਗਣਾ ਔਰ ਕਹਿਤਾ ਮੈਂ ਇਹ ਤਜਰਬਾ ਕਰਨਾ ਚਾਹੁੰਦਾ ਨੇ ਕਹਿੰਦਾ ਇੱਕ ਅੱਧੀ ਚੀਜ਼ ਮੰਗ ਕੇ ਵਾਜਿਓ ਹਾਂਜੀ ਫਿਰ ਹਟ ਜਿਓ ਜੇ ਕੋਈ ਸੇਵਾ ਥੋੜੀ ਮੰਗਣ ਬਹੁਤਾ ਘੱਲਿਆ ਫਿਰ ਓਖਾ ਹੋ ਜੀ ਹਾਂ ਬਾਹਰ ਬ੍ਰਹਮ ਸਾਧ ਰਿ ਸੇਵਾ ਥੋੜੀ ਮੰਗਣ ਬਹੁਤਾ ਵੀ ਉੱਥੀਆਂ ਨਾ ਸੇਵਾ ਤਾਂ ਥੋੜੀ ਕਰਦੇ ਨਾ ਹਾਂ ਜਿਆਦਾ ਨਹੀਂ ਇਹ ਤਾਂ ਮੈਂ ਤੇ ਕੁਝ ਮੰਗਦਾ ਹੀ ਤਾਂ ਹੀ ਹੈ ਨਾ ਔਰ ਥੋੜੀ ਹੋ ਗਈ ਥੋੜੀ ਸੇਵਾ ਉੱਧਰ ਜਿਆਦਾ ਹੋ ਗਿਆ ਮੈਂ ਬਿਲਦਾ ਦੀ ਅਰਦਾਸਾਂ ਕੀਤੀ ਲੰਬੀ ਕਰੀ ਜਾਂਦੇ ਸੇਵਾ ਕਰਦੇ ਨਹੀਂ ਗੁਜ਼ਾਰੇ ਪਾਕਿਸਤਾਨ ਦੇ ਵੀ ਚਾਹੁੰਦੇ ਨੇ ਸੇਵਾ ਥੋੜੀ ਮਨਜ਼ੂਰ ਬਹੁਤ ਹੈ ਇਹਨਾਂ ਦਾ ਕਿੱਡੀ ਨਬੀ ਲੋਕਾਂ ਦੀ ਅਜ਼ਾਦ ਕਰਦੋਂ ਤਾਂ ਸੇਵਾ ਹੈ ਜੀ ਕੋਈ ਮਿਲਦਾ ਜਰੂਰ ਹੈ ਬਸ ਐਨੀ ਮਤ ਪਰ ਹੋਰ ਲੈਣਾ ਆਪਣੇ ਜੇ ਤੱਕ ਇਹਨਾਂ ਤਜਰਬਾ ਕਰਨਾ ਪਰ ਆਪਣੇ ਜਤੌਣ ਵਾਸਤੇ ਕਰ ਦੂ ਕਰ ਸਕਦਾ ਪਰ ਉਹਦਾ ਨੁਸਾਨ ਹੋਣੀ ਜ਼ਰੂਰੀ ਹੈ ਇਹ ਸਿਰ ਮੈਂ ਸੁਧਾਰ ਜਾਂਦੀ ਹਾਂ ਹਾਂਜੀ ਸਾਰ ਬ੍ਰਹਮ ਸਾਧ ਰਿਤ ਬਸੇ ਨਾਨਕ ਉਦਰੇ ਸਾਧ ਸੁਣ ਰਸੇ ਸਾਰ ਬ੍ਰਹਮ ਸਾਧ ਰਿਤ ਬਸੇ ਕਿਉਂਕਿ ਜਿਹੜਾ ਸਾਧ ਹੈ ਉਸ ਵੇ ਸਾਧੂ ਹੈ ਸਾਦਾ ਸਾਧੂ ਇੱਕੋ ਹੀ ਹਰਨ ਉਹਦੇ ਦੇਚ ਪਾਰ ਬ੍ਰਹਮ ਵਸਦੇ ਸਾਧ ਜਦ ਦਾ ਰਾਮ ਅੰਦਰ ਪਰਵਾਸ ਹੈ ਮਨ ਵਿਸਰਾਮ ਹੈ ਨਾ ਸਾਚਨਾ ਕੇ ਮਨ ਵਿਸਰਾਮ ਉਹਦੇ ਅੰਦਰ ਹੁਕਮ ਵਸਦਾ ਪਾਰਬ੍ਰਹਮ ਪਾਰਬ੍ਰਹਮ ਬ੍ਰਹਮ ਨਵਾਸ ਉਹ ਫਿਰ ਜੇ ਕੋਈ ਸਿੱਖ ਤੇ ਸੇ ਭੜੇ ਕੋ ਗੱਲ ਹੁੰਦੀ ਹੈ ਉਹ ਕਹਿ ਨਾ ਤਾਂ ਹੋ ਜਾਂਦੀ ਹੈ ਜਿਸਕਾ ਕਿ ਗੱਲ ਕਿਤੇ ਕਿਤੇ ਇਦਾਂ ਮੈਂ ਸੁਹਾ ਜਾਂਦੀ ਪਰ ਕਰਦਾ ਹੀ ਨਹੀਂ ਜੇ ਕਰ ਦੇਵੇ ਹੋ ਜਾਂਦੀ ਉਹ ਕਰਦਾ ਨਹੀਂ ਇਹ ਨੁਕਸਾਨ ਬਹੁਤ ਜ਼ਿਆਦਾ ਹੈ ਉਹ ਨਹੀਂ ਕੱਟੇ ਵਾਲੀ ਚੀਜ਼ ਪਰਖਵਨ ਅੜਿਆ ਹੋਈ ਜਾਣਾ ਜ਼ਰੂਰੀ ਹੈ ਜੋ ਨਾਵੇ ਕਹੇ ਆਪਣੀ ਦਰਫਤੇ ਉਹਦੀ ਇੱਛਾ ਵੀ ਹੋਵੇ ਉਹ ਕੋਪਨਾ ਦਾਮੇ ਦਾ ਦੱਸ ਪਰਮੈਸ਼ਰ ਦਾ ਇਛਾ ਲੈ ਕੇ ਯਕੀਨ ਦਵਾ ਦੀ ਇਹ ਨੂੰ ਜੀਕੀਨ ਦਵਾ ਦੀ ਜੇ ਸਾਥ ਨਹੀਂ ਪਾਦਾ ਹੋਈ ਨਾ ਬੜ ਜੂਵੇ ਹਾਂ ਸੇ ਯਰ ਉਪਰ ਜੋ ਬਸੇ ਪਾਰਬ੍ਰਮ ਸਾਤੇ ਹਸੇ ਜੋ ਸਾ ਆਪਣਾ ਸਰਵਾਦ ਹੋ। ਨਾਨਕ ਉਦਰੇ ਸਾਦ ਸੁਣ ਰਸ ਹੈ। ਨਾਨਕ ਉਦਰੇ। ਹੋਇਆ। ਸਾਦ ਸੁਣ ਰਸ ਹੈ ਸਾਦੀ ਰਸਨਾ ਤੋਂ ਜੋ ਸੁਣਿਆ ਉਹਦੇ ਨਾਲ ਉਦਾਰ ਹੋਇਆ। ਸਾਦੀ ਰਸਨਾ ਤੋਂ ਜੋ ਸੁਣਿਆ ਔਰ ਰਸ ਆਇਆ ਜਿਹਨੂੰ ਉਦਾਰ ਹੋਇਆ ਜਿਹਨੂੰ ਰਸ ਜੀ ਨਾਲ ਉਦਾਰ ਹੋਇਆ। ਸੁਣ ਕੇ ਰਸ ਜਵੇ ਜੇ ਰਸ ਆਜਵੇ ਜੇ ਸੁਣ ਕੇ ਉਹ ਜੋ ਰਸ ਆਜਵੇ ਉਹਦਾ ਆਧਾਰ ਹੈ ਕਿ ਉਹ ਰਸ ਜੀ ਆ ਉਹਦਾ ਆਧਾਰ ਨਹੀਂ ਹੋਵੇ ਕਿਤੇ ਇਹ ਵੀ ਸਭ ਤਰ੍ਹਾਂ ਹਰ ਕਿਸੇ ਦਾ ਆਧਾਰ ਨਹੀਂ ਹੋ ਸਕਦਾ ਜੇ ਨੂੰ ਰਸ ਆ ਉਹਦਾ ਆਧਾਰ ਜ਼ਰੂਰ ਹੋ ਜਾਣਾ ਪਤਾ ਹੀ ਜਾਂਦਾ ਹੋਏ ਜੇ ਜੇ ਬਾਣੀ ਬਿਠਾ ਤਾਂ ਜੀਵਨ ਬਿਠਾ ਲਕੂਏ ਲੋ ਯਾਨੀ ਜੀਣੋ ਇਹ ਬਾਣੀ ਅਰਥ ਚੱਗੇ ਲੱਗ ਗਏ ਐ ਕਹ ਲੋ ਰਾਗਵਨ ਹੈ ਚੱਗੇ ਲੱਗ ਕੇ ਬੜੀਆ ਲੱਗੇ ਉਹਨੂੰ ਰਸ ਆ ਗਿਆ ਇਹਦਾ ਜਿਨੋਂ ਪੈ ਲੱਗੇ ਉਹ ਨਹੀਂ ਰਸ ਉਹਦੇ ਮਤਲਬ ਦਾ ਰਸ ਜਿਹੜੇ ਉੱਪਰ ਨਾਲ ਨਹੀਂ ਉਦਰੇ ਸਾਹੁੰਨਰਾ ਵਿਰੋਧ ਕਰਨਾ ਨਾ ਬਟੋਹਾ ਗੱਲ ਦਾ ਵੀ ਵਿਰੋਧ ਕਰਦੇ ਗੱਲ ਦਾ ਵੀ ਵਿਰੋਧ ਕਰੋ ਤਾਂ ਹੀ ਜੁੜ ਜਾਣਾ ਲੱਗਦਾ ਕੋਈ ਨਾ ਕੋਈ ਗੱਲ ਹੈ ਚਾਹੇ ਤੋਂ ਦੀ ਪਹਿਲੀ ਸੁਣੀਏ ਤੇ ਚਾਹੇ ਗੱਲ ਜੇ ਤਾਂ ਕਦੇ ਕੋਈ ਗੱਲ ਹੈ ਪਹਿਲੀ ਨਹੀਂ ਵਿਰੋਧ ਕਰਦੀ ਹੁੰਦੀ ਆ ਆਹੋ ਜੇ ਕੋਈ ਨਹੀਂ ਸੁਣਿਆ ਉਹ ਵਿਰੋਧ ਕਰਦੀ ਸੁਣਿਆ ਕਰਦੇ